दक्षिणे मोहल्ला 5वा जामू पस्सी हठ मैं पीरी महिंज नाल अब्बे दुख उलाहे अम नानक नदर निहाल जामू पसी हठ याद करणी मैं पासा वटया ना तू फेरया तू पासा तू दीती पहल पासा फेरया ਕਿਲੀ ਮੰਜੇ ਨਾਲ ਪਰ ਤਾਂ ਮੇਰੇ ਨਾਲ ਹੀ ਘੜਾ ਸੀ ਮੇਰੀ ਗੋਪਟ ਕੀਤੀ ਹੋਈ ਸੀ ਛਾਗ ਦੀ ਬਹਾਰ ਨੂੰ ਸੀ ਜਾਂ ਅੰਦਰ ਨੂੰ ਚੱਕੀ ਤਾਂ ਉਹ ਤਾਂ ਨਾਲ ਹੀ ਸੀ ਕਿਲੀ ਮੰਜੇ ਨਾਲ ਬੁਲਾਏ ਸਾਰੇ ਦੁੱਖ ਲੈ ਕੇ ਦੂਰ ਹੋ ਗਏ ਘਾਣਕ ਨਜ਼ਰ ਨਿਹਾਲ ਐਸੀ ਨਜ਼ਰ ਕੀਤੀ ਐਸੀ ਦ੍ਰਿਸ਼ਟੀ ਕੀਤੀ ਸਾਰੇ ਦੁੱਖ ਲਾਟੇਲ ਨਿਹਾਲ ਕਰ ਦਿੱਤਾ ਹੈਲੀ ਨਿਗਾਨ ਨਾਲੇ ਹਾਂਜੀ ਟੱਕੜੀ ਨਾਲ ਸਾਰੇ ਦੁੱਖ ਦੂਰ ਹੋ ਗਏ ਹਾਂਜੀ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਉ ਲੰਮੇ ਸੇਵੈ ਦਰਖੜਾ ਪੀリエ ਤੂੰ ਜਾਣ ਮਹਿੰਜਾ ਸਾਉ ਜੋਈ ਸਾਈਂ ਮੂੰਹ ਖੜਾ ਨਾਨਕ ਬੈਠਾ ਪੱਖੇ ਵਾਉ ਇੱਥੇ ਦਰਸ਼ਨ ਹੋਇਆ ਕਰ ਕੀ ਰਿਹਾ ਸੀ ਕਿਹਦਾ ਦਰਸ਼ਨ ਹੋਇਆ ਇਹਨੇ ਨਜ਼ਰ ਕੀਤੀ ਹੈ ਇਹਨੇ ਨਿਹਾਲ ਕੀਤਾ ਆਨੰਦ ਕੋ ਬੈਠਾ ਪੱਖੇ ਬੋ ਆਨੰਦ ਕਹਿੰਦੇ ਬੈਠਾ ਹਵਾ ਖਚ ਰਿਆ ਸੀ ਸਾਲ ਲੈ ਰਿਆ ਸੀ ਸਾਲ ਲੈਦੀ ਸਭ ਲਵਾਇਆ ਸਾਰੇ ਉਹਦਾ ਲਵਾਇਆ ਲੈਂਦੇ ਨੇ ਆਪਦੀ ਲੈਂਦਾ ਕੋਈ ਆਪ ਦਾ ਸਮਝਾ ਲੈਂਦੇ ਆ ਬੈਠਾ ਪੱਖੇ ਬੋ ਲੰਬੇ ਸੇਵੇ ਦਰਖਣਾ ਉਹਦਾ ਪਤਾ ਨਹੀਂ ਕਦਾਂ ਸਾਲ ਲੈ ਰਿਆ ਹੈ ਜਦੋਂ ਇਹਨੂੰ ਹੋਸ਼ ਵੀ ਨਹੀਂ ਸੀ ਸਰੀਰ ਦੀ ਸੋਚੀ ਵੀ ਨਹੀਂ ਸੀ ਉਹ ਤਾਂ ਜਦਾ ਹੀ ਸਾਹ ਲੈ ਰਿਹਾ ਨੰਮੇ ਸੇਵੇ ਧਰਕਣਾ ਪਰੀਏ ਤੂੰ ਜਾਣ ਨੂੰ ਉਹ ਜਾਂ ਸਾਉ ਮਨ ਕਹਿੰਦਾ ਬੁੱਧੀ ਨੂੰ ਤੂੰ ਇਹ ਜਾਣ ਲੈ ਤੇ ਭੁੱਲ ਲੈ ਇਹੀ ਐ ਸੋ ਆਪਣਾ ਇਹੀ ਆਪਣਾ ਮਾਲਕ ਜੋ ਇਹ ਜ਼ਾਈ ਜਿਹੜਾ ਪੜੇ ਸਾਹਮਣੇ ਖੜਾ ਬੋ ਪਖਦਾ ਇਹੀ ਸੋ ਹੈ ਹੋ ਗਿਆ ਦਰਸ਼ਨ ਉਹਨੂੰ ਗੁੱਦੀ ਨੂੰ ਦਵਾਉਂ। ਅੰਦਰ ਨਹੀਂ ਹੋ ਗਿਆ ਦਰਸ਼ਨ। ਇਹਨੂੰ ਇਹ ਮੰਨ ਲੈ। ਇਹ ਹੀ ਹੈ ਦੂਜਾ ਹੋਰ ਕੋਈ ਦੋ ਤਾਂ ਹੈ ਹੀ ਨਹੀਂ ਅੰਦਰ ਤਾਂ ਹੈ ਉਹ ਇੱਕ ਇਹੀ ਹੈ ਜਿਹਨੂੰ ਰੱਬ ਦੇ ਦਿੱਤੀ। ਆਪਣੇ ਅੱਗੇ ਖੜਾ ਹੈ। ਖੜਾ ਆਪਣੇ ਬੂਰੇ ਵੂਹ ਖੜਾ। ਬੂਰੇ ਅੱਗੇ ਖੜਾ ਇਹੀ ਤਾਂ ਹੈ। ਇਹੀ ਤਾਂ ਸਾਹ ਦੇ ਰਿਹਾ ਇਸੇ ਨਾਲ ਤਾਂ ਬਾਬਾ ਨੂੰ ਆ ਰਹੀ ਹੈ ਉਹ ਤੱਕ। ਤਾਂ ਤਾਂ ਬੋਲਦੇ ਆ ਮੂੰਹ ਨਾਲ। ਹਾਂਜੀ। ਮਹੱਲਾ ਪੰਜਵਾਂ ਕਿਆ ਗਲਾਇਓ ਪੂਛ ਪਰ ਨਾ ਜੋ ਹੈ ਕੰਤ ਤੂੰ ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹੱਬ ਸੰਸਾਰ ਜੁ ਆ ਕਿਹੜੀ ਤੂੰ ਪੁੱਸ ਨੂੰ ਇਕੱਠਾ ਕਰੀ ਫਿਰਦਾ ਟੂੜੀ ਨੂੰ ਆ ਜਿਹੜੀ ਬਦਸਪਤੀ ਆ ਮਾਇਆ ਸਰੀਰ ਹੈ ਪੂਛਿਆ ਇਹਨੂੰ ਲਾਇਆ ਹੋਇਆ ਤਾਂ ਪਰ ਵੇਲ ਨਾ ਜੋ ਹੈ ਕਰਤਣਾ ਉਹ ਤੋਂ ਪੈਦਾ ਹੋਈ ਹੋਈ ਚੀਜ਼ ਆ ਉਹਨੂੰ ਤਾਂ ਉਹ ਗਲੜਾਉਂਦਾ ਆ ਜਿਹੜੀ ਆ ਮਾਇਆ ਦੀ ਵੇਲ ਹੈ ਉਹਦੇ ਮਤਲਬ ਦੀ ਨੀ ਹੈ ਉਹਦੇ ਵੱਲੀ ਇਹਦਾ ਧਿਆਨ ਹੁੰਦਾ ਜੋ ਹੈ ਤੰਤੜਾ ਤੰਤੜਾ ਦੀ ਜੋਨਾ ਹੈ ਇਹਦੇ ਵੱਲੀ ਚਾਕਦਾ ਹੈ ਉਹਦੀ ਦੇਸ਼ੀ ਆਤਮਾ ਵਾਲਾ ਆਤਮਾ ਬਲਵਾਨ ਹੁੰਦੀ ਹੈ ਆਤਮਾ ਦਿਰਵਲ ਹੁੰਦੀ ਹੈ ਸਰੀਰ ਬਲਵਾਨ ਹੁੰਦਾ ਸਰੀਰ ਦਿਰਵਲ ਹੁੰਦਾ ਉਹਦੀ ਧਿਆਨ ਇੱਥੇ ਨਹੀਂ ਹੈ ਅੱਖ ਦੀ ਨਿਗਾਹ ਘੜਦੀ ਹੈ ਵੱਧਦੀ ਹੈ ਧਿਆਨ ਆਦਮੀ ਦਾ ਉਹਦਾ ਧਿਆਨ ਨਹੀਂ ਹੈ ਇਸ ਵੱਲ ਭਾਇਆ ਦੇ ਸਰੀਰ ਨੇ ਪੁੱਸ ਜਿਵੇਂ ਹੁੰਦਾ ਤੂੜੀ ਹੈ ਦਾਣਾ ਵਿੱਚੋਂ ਨਿਕਲ ਜਾਂਦਾ ਹੈ ਆਤਮਾ ਨਿਕਲ ਜਾਂਦੀ ਹੈ ਆਤਮਾ ਦਾ ਦਾਣਾ ਹੈ ਸਰੀਰ ਰਹਿ ਜਾਂਦਾ ਪੁੱਸ ਕਹਿੰਦੇ ਤੂੰ ਤਾਂ ਪੁੱਸ ਨੂੰ ਘੜ ਲਾਈ ਫਿਰਦਾ ਇਹਦਾ ਹੀ ਧਿਆਨ ਹੈ ਹਰ ਵਕਤ ਗੱਲ ਆਇਆ ਪੁੱਸ ਪਰ ਵੇਲ ਨਾਲ ਜੋ ਕੰਤਲਾ ਤੰਤਲੇ ਦਾ ਮਤਲਬ ਨਹੀਂ ਹੈ ਇਹ ਵੇਲ ਕਿ ਤੂੜੀ ਜਿਹੜਾ ਬੀਜ ਲੱਗਦਾ ਹੈ ਮਤਲਬ ਦਾ ਬੀਜ ਜੇ ਬੀਜ ਫਲੇ ਫਲ ਹੈ ਮਤਲਬ ਦਾ ਇਹਨਿਓ ਦੇ ਮਤਲਬ ਦਾ ਹੁੰਦਾ ਬੇਲ ਪਰ ਬੇਲ ਨਾਲ ਜੋ ਹੈ ਕਤਲ ਕੰਤ ਤੂੰ ਹਾਂ ਕੰਤ ਤੂੰ ਸਾਰੇ ਸਰੀਰ ਤੇਰੇ ਤੇਰੇ ਵਾਸਤੇ ਕੁਛ ਨਹੀਂ ਉਹਦੀ ਵੈਲਿਊ ਹੈ ਤੂੰ ਇਹਨੂੰ ਜੋਂਦਾ ਤੂੰ ਨਹੀਂ ਦੇਖਦਾ ਤੇਰਾ ਉਹਦੇ ਵੱਲ ਧਿਆਨ ਨਹੀਂ ਹੈ ਨਾਲੇ ਫੁੱਲਾਂ ਸੰਧੀ ਵਾੜ ਖਿੜਿਆ ਆਪ ਸੰਸਾਰ ਜਿਉਂ ਆ ਜਿਹੜੇ ਫੁੱਲ ਖਿੜੇ ਨੇ ਨਾ ਜਿੱਥੇ ਆਤਮਾ ਹੈ ਖਿੜੇ ਹੋਏ ਫੁੱਲ ਨਹੀਂ ਹਿਰਦੇ ਉਥੇ ਜਿਆਦਾ ਧਿਆਨ ਹੈ ਤੇਰਾ ਜਿਵੇਂ ਬਾਗ ਦੇ ਵਿੱਚ ਬੇਲ ਵੀ ਹੁੰਦੀ ਹੈ ਪੱਤੇ ਵੀ ਹੁੰਦੇ ਨੇ ਬੇਲ ਚੜੀ ਹੁੰਦੀ ਹੈ ਬਾਗ ਦੇ ਉੱਤੇ ਪਰ ਫੁੱਲਾਂ ਵਿੱਚ ਧਿਆਨ ਹੁੰਦਾ ਸਾਰਿਆਂ ਦਾ ਪੱਤੇ ਨਹੀਂ ਦੇਖਦੇ ਕੋਈ ਬੇਲ ਨਹੀਂ ਦੇਖਦੇ ਕੋਈ ਬਾਗ ਨਹੀਂ ਦੇਖਦਾ ਧਿਆਨ ਫੁੱਲਾਂ 'ਚ ਹੁੰਦਾ ਐ ਤੇਰਾ ਫੁੱਲਾਂ 'ਚ ਧਿਆਨ ਲੈਂਦਾ ਜਿਹੜੇ ਹਿਰਦੇ ਖਿੜੇ ਹੋਏ ਹਿਰਦੇ ਨੇ ਜਿਨ੍ਹਾਂ ਦੇ ਨਾਮ ਨਾਲ ਉੱਥੇ ਧਿਆਨ ਹੈ ਤੇਰਾ ਜਿਆਦਾ ਪਰਮੇਸ਼ਰ ਦਾ ਧਿਆਨ ਹਿਰਦੇ ਦੇ ਵਿੱਚ ਜ਼ਿਆਦਾ ਹੈ ਭਰ ਕੇ ਪੂਰਾ ਕਰਨਾ ਸਭ ਨੂੰ ਠੀਕ ਹੈ ਪਰ ਜਿਹੜੇ ਖਿੜੇ ਹੋਏ ਫੁੱਲ ਨੇ ਉਹਨਾਂ ਨੇ ਆਪ ਓ ਜੀਵਾਂ ਨੇ ਆਪ ਜ਼ਿਆਦਾ ਧਿਆਨ ਰੱਖਿਆ ਆਪਣੇ ਮੂਲ ਵਿੱਚ ਹਾਂ ਉਹ ਧਿਆਨ ਰੱਖਿਆ ਬਿਲਕੁਲ ਆਪ ਧਿਆਨ ਰੱਖਿਆ ਤਾਹੀ ਖੜੇ ਨੇ ਠੀਕ ਹੈ ਜੀ ਉਹਨਾਂ ਦਾ ਵੀ ਧਿਆਨ ਉੱਥੇ ਹੈ ਪਰਮੇਸ਼ਰ ਦਾ ਵੀ ਧਿਆਨ ਉੱਥੇ ਹੈ ਜਦੋਂ ਆਪਣੇ ਅਸੀਂ ਆਪਣਾ ਕੰਮ ਸੰਭਾਲ ਰਿਹਾ ਉਹ ਤੇ ਪਰਮੇਸ਼ਰ ਉਹਦੀ ਮਦਦ ਵੀ ਕਰ ਰਿਹਾ ਖੁਦਾ ਕਹਿੰਦਾ ਨੇ ਗੋਡ ਹੈਲਪ ਦੋਸ ਹੂ ਹੈਲਪ ਥੈਮ ਸੈਲਵਜ਼ ਜਿਹੜੇ ਆਪਣਾ ਹਿਰਦਾ ਆਪ ਸਵਾਲ ਲੈਦੇ ਨੇ ਆਪਣੇ ਹਿਰਦੇ ਫਲ ਨੂੰ ਖੜਾ ਰਹਿਣੇ ਪਰਮੇਸ਼ਰ ਵੀ ਉਹਨਾਂ ਨੂੰ ਬਲਦ ਦੇ ਰਿਹਾ ਉੱਥੇ ਉਹਦੇ ਵਿੱਚ ਠੀਕ ਹੈ ਦੋਸ ਉੱਥੇ ਮਨ ਔਰ ਚਿੱਤ ਹੋ ਗਿਆ ਜੀ ਹਾਂ ਜੀ ਠੀਕ ਹੈ ਇਹ ਸਮਝੋ ਕਿ ਨਾਨਕ ਭਗਤਾਂ ਸਦਾ ਵਿਗਾਸ ਉਹ ਸਥਿਤੀ ਹੈ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਤੂੰ ਸੁਗੜਾ ਤਗੜਾ ਟੰਨਾ ਕੜੇ ਆਇਆ ਤੇਰੀ ਕਾਹਤ ਬਹੁਤ ਵਧੀਆ ਘੜੀ ਹੈ ਜੈ ਜੈ ਘੜਿਆ ਸੀ ਹੋਏ ਜਾਈਏ ਤੂੰ ਆਪਣੇ ਬੋਲ ਸਰੂਪ ਤੂੰ ਸਭ ਮੈਂ ਵਰਤਨਤਾ ਸਾਰਿਆਂ ਦੇ ਅੰਦਰ ਆ ਤੂੰ ਸਾਰਿਆਂ ਦੇ ਵਿੱਚ ਵਰਤਨਤਾ ਉੱਪੇ ਠਾਕੁਰ ਤੇ ਲੋਏ ਠਾਕੁਰ ਕਹਨੇ ਆ ਘਰ ਮੇ ਠਾਕੁਰ ਨਦਰ ਨਾ ਆਵੇ ਠਾਕੁਰ ਹੈ ਆਪੇ ਠਾਕੁਰ ਸੇਵਕੋ ਸੇਵਕ ਕੌਣ ਤੇਰਾ ਮਨ ਤੇਰਾ ਸੇਵਕ ਹੈ ਮਨ ਕਰਕੇ ਸੇਵਕ ਹੈ ਜਿੱਤ ਕਰਕੇ ਠਾਕੁਰ ਹੈ ਆਪੇ ਪੂਜਤਾ ਆਪਣੇ ਆਪ ਦੀ ਆਪੇ ਪੂਜਾ ਕਰਦੇ ਆਪੇ ਜਬ ਆਪਣਾ ਜਾਪ ਆਪਣੀ ਪੂਜਾ ਆਪੇ ਕਰਦਾ ਹੈ ਪੂਜਾ ਕੀ ਕਰਦੀ ਹੁੰਦੀ ਹੈ ਤਨ ਮੰਨਰ ਕੋ ਚੜਾਉ ਤਨ ਮੰਨ ਇੱਕ ਕਰ ਲੈਣਾ मन बेचे सतगुरु के पास सतगुरु नु मन बेच देनो एक हो जानो यही पूजा पूझे। आपे पूजंता दान ना बिना आप तू आपे सतवंता दाता भी तू है दान देने वाला भी तू है बिना प्राप्त करने वाला भी तू है दान होता चोगा खिलाण वाला बीटर होता चोगा चुगण वाला ਆਪੇ ਸਤਵੰਤਾ ਸਤਵੰਤਾ ਵੀ ਆਪੇ ਹੈ ਜਦ ਹੋ ਜਾਂਦਾ ਤੇ ਤੇਰਾ ਖਾਣਾ ਹੀਰੇ ਮੋਤੀ ਹੋ ਜਾਂਦਾ ਤੇ ਗੁਣਾਂ ਦੀ ਖੁਰਾਕ ਹੋ ਜਾਂਦੀ ਹੈ ਤੇ ਤੂੰ ਕੀ ਖਾਂ ਬ੍ਰह्म ਗਿਆਨੀ ਦਾ ਭੋਜਨ ਗਿਆਨ ਹੋ ਜਾਂਦਾ ਤੇ ਤੂੰ ਗਿਆਨ ਖਾਂਦਾ ਜੋ ਗੁਣ ਜੋ ਪ੍ਰਾਪਤ ਹੁੰਦਾ ਗੁਣ ਮੈਂ ਗਿਆਨ ਪ੍ਰਾਪਤ ਹੋਏ ਇਹ ਤੇਰੀ ਖੁਰਾਕ ਬਣ ਜਾਂਦੀ ਹੈ ਗੁਰਬਾਣੀ ਦਾ ਗਿਆਨ ਤੇਰੀ ਖੁਰਾਕ ਬਣ ਜਾਂਦੀ ਹੈ ਗੁਰਬਾਣੀ ਇੱਕ ਥਾਲ ਹੈ ਸਾਰਾ ਸਾਰੇ ਅੱਖਰ ਕਥਾਰੂਪ ਜਿਹੜੇ ਅੱਖਰਾਂ ਦੀ ਜੋ ਚੀਜ਼ ਪਈ ਹੈ ਜੇ ਕੋ ਖਾਵੇ ਜੇ ਕੋ ਪੁੱਛੇ ਦੱਸਾ ਹੋਏ ਉਦਾਰੋ ਠੀਕ ਹੈ ਜੀ ਇਹਨੂੰ ਵਿਚਾਰ ਨਾਲ ਹੀ ਖਾਣਾ ਜੋ ਵਿਚਾਰਿਆ ਹੋਇਆ ਟੀਜ ਹੀ ਖਰਾਦ ਆ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਜਤੀ ਹੋਵੇ ਸਤੀ ਹੋਵੇ ਪ੍ਰਭ ਜਤੀ ਵੀ ਹੈ ਪ੍ਰਭ ਸਤੀ ਵੀ ਹੈ ਇਹ ਕੋ ਉਹਦੇ ਚੇਰੇ ਤੋਂ ਪ੍ਰਭ ਨਿਰਮਲਾ ਵੀ ਜੋ ਹੈ ਮੈਨੂੰ ਵੀ ਜੋ ਉਹ ਬਾਲ ਜਤੀ ਸਤੀ ਆ ਨਿਰਮਲੇ ਜਿਹੜੇ ਨੇ ਉਹ ਡੁਪਲੀਕੇਟ ਨੇ ਉਹ ਪ੍ਰਭੀ ਜਤੀਆ ਪ੍ਰਭੀ ਸਤੀਆ ਪ੍ਰਭੀ ਨਿਰਮਲਾ ਮੇਰੇ ਹਰ ਭਗਵੰਤਾ ਜਿਹੜਾ ਮੇਰਾ ਹਰ ਭਗਵੰਤਾ ਹੈ ਉਹ ਜਤੀ ਤੇ ਗੁਣ ਦੇ ਬਾਕੀ ਤਾਂ ਮਾਇਆ ਧਾਰੀ ਨੇ ਲਈ ਬਦਰ ਦੇ ਸਰੀਰ ਜੁੜੇ ਹੋਏ ਨੇ ਮਾਇਆ ਨਾਲ ਕਹਿੰਦੇ ਜਤੀ ਸਤੀ ਫੇਰ ਜਿਹੜਾ ਹਰ ਭਗਵੰਤਾ ਹੈ ਉਹ ਜਤੀ ਵੀ ਹੈ ਸਤੀ ਵੀ ਹੈ ਨਿਰਮਲਾ ਵੀ ਹੈ ਨਿਰਮਲਾ ਹੋਣਾ ਨਹੀਂ ਹੈ ਜਤੀ ਇਸ ਕਰਕੇ ਹੈ ਮਾਇਆ ਦੀ ਭੁੱਖ ਨਹੀਂ ਆਉਂਦੀ ਮਾਇਆ ਜਲਪਤ ਨਹੀਂ ਸੱਚੀਏ ਇਸ ਕਰਕੇ ਕਿਉਂ ਹੈ ਸਤ ਸਰੂਪ ਮਰਦਾ ਜਬਨਾ ਹੀ ਨਹੀਂ ਹਰ ਭਗਵੰਤਾ ਜਿਹੜਾ ਮੇਰੋ ਹਰ ਭਗਵੰਤਾ ਨੇ ਜਿਹੜੇ ਬਾਹਰ ਬੜੀ ਫਿਰਦੇ ਨਹੀਂ ਜਿੱਤੇ ਸੱਚੇ ਨਿਰਮਲੇ ਉਹ ਡੁਪਲੀਕੇਟ ਨੇ ਉਹ ਉਹ ਜਿਆ ਬਣਨਾ ਚਾਹੁੰਦੇ ਨੇ ਜੇ ਬਣ ਜਾਣਗੇ ਹੋ ਜਾਣਗੇ ਉਹ ਜੇ ਜਦੋਂ ਪਹੁੰਚ ਜਾਣਗੇ ਹੋ ਜਾਣਗੇ ਹਾਂਜੀ ਸਭ ਬ੍ਰਹਮ ਪ੍ਰਸਾਰ ਪਸਾਰਿਓ ਆਪੇ ਖੇਲਨਤਾ ਇਹ ਆਵਾ ਗਵਨ ਰਚਾਇਓ ਕਰ ਚੋਜ ਦੇਖੰਤਾ ਸਭ ਬ੍ਰਹਮ 사ਸ ਬ੍ਰਹਮ ਨੇ ਇਤ ਸਾਰਾ ਸਭ ਹਰ ਜਗ੍ਹਾ ਬ੍ਰਹਮ ਹੈ। ਪਸਾਰ ਆਪੇ ਖੁਦ ਖੇਲੰਤਾ ਆਪੇ ਬ੍ਰਹਮ ਖੇਲਦਾ ਸਾਰਿਆਂ ਬ੍ਰਹਮ ਖੇਲਦਾ ਪੂਰ ਬ੍ਰਹਮ ਦੀ ਫੇਰ ਖੇਲਦਾ ਹੁੰਦਾ ਤੇ ਪਾਣ ਬਲ ਬਣ ਜਾਂਦਾ ਹੁੰਦਾ ਜਿੰਨਾ ਚਿਰ ਬ੍ਰਹਮ ਆਪ ਖੇਲਦਾ ਸਾਰਿਆਂ ਬ੍ਰਮਦਾ ਹੀ ਹੁੰਦਾ ਹੈ ਬ੍ਰਮਸਾਵਤ ਨਹੀਂ ਹੁੰਦਾ ਬ੍ਰਮ ਦਾ ਮਨ ਮਾਇਆ ਚ ਹੁੰਦਾ ਮਾਇਆ ਕਰਕੇ ਖੇਲਦਾ ਔਰ ਖੇਲਦਾ ਕਰਦੇ ਨਾਲੇ ਕਿ ਆਵਾਜ਼ ਅਰ ਜਾਇ ਉਹਨੂੰ ਕਰ ਚੋਜ ਦਿਖਾਤਾ ਆਵਾ ਗੋਣ ਦੇ ਵਿੱਚ ਪਿਆ ਹੋਇਆ ਵਰਪ ਇਹਦੇ ਵਿੱਚ ਰਚਿਆ ਹੋਇਆ ਕਰ ਚੋਜ ਦਿਖਾਤਾ ਚੋਜ ਕਰਦਾ ਹੈ ਕਰਕੇ ਦਿਖਾਉਂਦਾ ਸੰਸਾਰ ਦੇ ਵਿੱਚ ਠੀਕ ਲੈਂਦਾ ਚੋਜ ਕਰਦਾ ਜਿਹੜਾ ਬ੍ਰਹਮ ਹੈ ਇਹਦਾ ਇਹ ਅੱਧਾ ਜੀ ਇਹਦਾ ਅੱਧਾ ਦੂਆ ਅੱਧਾ ਕੀ ਹੈ ਬ੍ਰਹਮ ਅੱਧਾ ਦਾ ਜੀਵਾਤਮਾ ਪਹਿਲਾਂ ਬ੍ਰਹਮ ਦਾ ਜੇ ਬਣ ਜੂ ਫਿਰ ਤਾਂ ਇੱਕੇ ਹੋ ਜਾਣਗੇ ਦੋਏ ਕਾਈ ਤਾਂ ਨੂੰ ਪੜਾਇਆ ਪੜਾ ਰਿਹਾ ਹੈ ਗੁਰਬਾਣੀ ਕਿਉਂ ਪੜਾ ਰਹਾ ਹੈ ਬ੍ਰਹਮਾ ਬਣਾਉਣ ਲਈ ਤਾਂ ਪੜਾ ਰਹਾ ਹੈ ਗੁਰਬਾਣੀ ਉਪ ਉਤਾਰ ਹੈ ਬ੍ਰਹਮਾ ਦਾ ਪਹਿਲਾਂ ਰਿਪ ਤੇ ਬ੍ਰਹਮਾ ਦਾ ਬਣ ਗਿਆ ਬ੍ਰਹਮਾ ਇਹ ਕਹੇ ਲੋ ਤੁਸੀਂ ਉਪ ਉਤਾਰ ਵੀ ਆਏ ਨਾ ਬੂੜ ਗਿਆ ਨਹੀਂ ਹੈ ਪੂਰਨ ਬ੍ਰਹਮ ਕਦੋਂ ਬਣੂਗਾ ਕੀ ਗੁਰਬਾਣੀ ਦੀ ਪੂਰੀ ਸੋਝੀ ਆ ਜੀ ਉਸ ਸਮੇ ਬ੍ਰਹਮਾ ਔਰ ਬ੍ਰਹਮ ਮਿਲ ਜਾਣਗੇ ਆਪਸ ਵਿੱਚ ਮਿਲ ਜਾਣਗੇ ਦੇਖੋ ਨਾ ਜੇ ਜੋਤ ਇੱਕੋ ਜੀ ਜੋਤ ਹੋਗੀ ਹੁਣ ਜੋਤ ਉਹਦੀ ਮੰਦਪ ਹੈ ਬਲੀਦ ਜੋਤ ਹੈ ਜੋ ਦੋਨਿਆਂ ਵਿੱਚ ਸਟ੍ਰੌਂਗ ਚਾਈਦੀ ਹੈ ਜਿਹੜੀ ਚਿਤ ਦੀ ਜੋਤ ਹੈ ਉਹਦੀ ਇੱਕੋ ਜੋਤ ਹੋਏ ਤੇ ਬਿਲਦਲ ਇੱਕ ਜੋਤ ਹੈ ਕੈਮਲੀ ਪਹਿਲਾ ਜੋਤ ਦੇ ਵਿੱਚ ਬੁੱਧੀ ਦੇ ਵਿੱਚ ਬਲੀਦਾ ਹੈ ਅਗਿਆਨਤਾ ਹੈ ਅਗਿਆਨਤਾ ਹੈ ਅਗਿਆਨਤਾ ਦੂਰ ਹੋ ਜੂਈ ਕੋ ਜਾਣਗੇ ਹਾਂਜੀ ਤਿਸ ਬਾਹੜ ਗਰਭ ਨਾ ਪਾਵਈ ਜਿਸ ਦੇਵੈ ਗੁਰਮੰਤਾ ਜਿਉ ਆਪ ਚਲਾਵੈ ਤਿਉ ਚੱਲ ਦੇ ਵਸ ਨ ਜਨਤਾ ਇਸੇ ਬਾਰਾ ਕਰਮਨ ਪਾਪ ਈ ਜਿਸ ਦੇ ਤੇ ਸਦਾ ਹੀ ਜਿਹਨੂੰ ਗੁਰਮੁਖ ਤਰ ਦੇਤਾ ਜਿਹਨੂੰ ਸਮਝ ਆ ਗਈ ਉਹ ਦੁਬਾਰਾ ਜੁंदी ਨਹੀਂ ਪੈਂਦਾ ਕਰਮ ਦੀ ਜੂੜ ਜਿੱਨੀ ਪੈਂਦਾ ਦੁਬਾਰਾ ਜਿਹਨੂੰ ਗੁਰਮੁਖਤਾ ਜਿਹਨੂੰ ਗੁਰਬਾਨੀ ਦੀ ਸੋਝੀ ਆ ਜਾਏ ਜਿਹਨੂੰ ਸਮਝ ਆ ਜਾਏ ਜੋ ਆਪ ਚਲਾਵਾ ਹੈ ਤੂੰ ਚੱਲਦੇ ਕਿਛ ਵਚਨਾ ਜਨਤਾ ਇਹ ਜਨਤਾ ਜਿਉਂ ਆਪ ਚਲਾਉਣਾ ਹੈ ਉਵੇਂ ਚਲਦੇ ਨੇ ਇਹਨਾਂ ਦੇ ਬਸ ਵਿੱਚ ਕੁਝ ਨਹੀਂ ਫੇਰ ਵੀ ਕੁਝ ਨਹੀਂ ਚਲਦੇ ਉਵੇਂ ਨੇ ਜਵੇਂ ਤੂੰ ਚਲਾਉਂਦੇ ਪਰ ਉਹ ਦਵਾਲਾ ਜੂਦੀ ਜਿਹੀ ਹੁੰਦਾ ਜਿਹਨੂੰ ਸੋਝੀ ਆ ਜਾਵੇ ਕੁਰਬਾਨੀ ਦੀ ਪਰ ਸੋਝੀ ਉਹ ਆਪ ਦਿੰਦਾ ਹੈ ਆਪ ਲੈਣੀ ਇਹ ਕੀ ਗੱਲ ਸੋਝੀ ਉਹ ਆਪ ਭੇਜਦਾ ਦੰਦਾ ਭਗਤ ਤਾਂ ਪੈਦਾ ਕਰ ਦਿੰਦਾ ਲੈਣੀ ਤਾਂ ਅਸੀਂ ਆਪੇ ਹੈ ਸੋਝੀ ਲੈਣੀ ਆਪਣਾ ਹੁਕਮ ਚੱਲਦਾ ਹੈ ਕੋਹਦਾ ਹੁਕਮ ਚੱਲਦਾ ਕਿਹਦਾ ਹੁਕਮ ਚੱਲਦਾ ਲੈਣ ਪਰ ਜੇਦਾ ਉਹਦੀ ਉਹਦਾ ਹੁਕਮ ਚੱਲ ਜਾ ਫਿਰ ਤਾਂ ਸੋਝੀ ਲੈ ਲੈਂਦਾ ਜੇ ਆਪਣਾ ਹੁਕਮ ਚੱਲਦਾ ਹੋਵੇ ਫਿਰ ਨਹੀਂ ਲੈਂਦਾ ਜੇ ਆਪਣਾ ਹੁਕਮ ਪ੍ਰਧਾਨ ਹੈ ਫਿਰ ਉਹਦੀ ਸੋਝੀ ਨਹੀਂ ਲੈਂਦਾ ਹਾਂਜੀ ਠੀਕ ਹੈ ਪਹਿਲੀ ਗੁਰਬਾਣੀ ਨੂੰ ਬੋਲ ਗੁਰਬਾਣੀ ਨੂੰ ਤਾਂ ਸਰੈਂਡਰ ਜਾਤ ਹੁੰਦਾ ਆਪਣਾ ਹੁਕਮ ਜਿਹੜਾ ਹੈਗਾ ਉਹਦੇ ਅੱਗੇ ਸਿਰ ਝੁਕਾ ਦਿੰਦਾ ਠੀਕ ਜਿੱਦਾਂ ਆਪਣੀ ਅਕਲ ਬੜੀ ਹੈ ਦੂਏ ਦੀ ਅਕਲ ਕਦੋਂ ਲੈਂਦਾ ਜਿੱਦਾਂ ਜਦ ਆਪਣੀ ਮਾਤਰੂ ਬੜੀ ਮੰਨਦਾ ਹੈ ਦੀ ਮਾਤਰੂ ਕਦੋਂ ਪੁੱਛਦਾ ਕਦੋਂ ਲੈਂਦਾ ਹਾਂਜੀ ਜਿਉ ਆਪ ਚਲਾਵੇਂ ਤੂੰ ਚਲਦੇ ਕਿਸ ਵਸ ਨਾ ਜਨਤਾ ਇਹ ਜਾਣਤਾ ਨੇ ਵਸਦੀ ਕੁਝ ਵੀ ਆਏਗਾ ਚੱਲ ਦੇ ਇਹ ਵੀ ਹੁਕਮ ਚੇਦੇ ਠੀਕ ਹੈ ਪਰ ਹੁਣ ਇੱਥੇ ਆਪ ਦਾ ਭਾਵ ਅਸੀਂ ਕਰਾਂਗੇ ਚਿੱਤ ਹੈ ਜੀ ਤਾਂ ਜਿੱਤੇ ਕਰਾਂਗੇ ਹੋਰ ਕਿਸੇ ਪਰਮੇਸ਼ਰ ਤੋਂ ਕਰਾਂਗੇ ਠੀਕ ਹੈ ਜੀ ਤੇ ਜੰਤ ਜਿਹੜਾ ਇਹਦੇ ਵਿੱਚ ਚਿੱਤ ਹਰਮੰਦ ਹੈ ਜੀ ਉਹ ਦਾ ਸ਼ਰੀਰ ਹੈ ਸ਼ਰੀਰ ਨੇ ਵਿਚਾਰਾ ਨਹੀਂ ਕੀ ਕਰਦਾ ਜਿਵੇਂ ਆਤਮਾ ਨੇ ਚਲਾਉਣਾ ਚਾਹਣਾ ਠੀਕ ਹੈ ਸ਼ਰੀਰ ਨਹੀਂ ਜੁੜ ਸਕਦਾ ਜੁੜਨਾ ਹੈ ਚਿੱਤ ਨੇ ਪਰਮੇਸ਼ਰ ਨਾਲ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਥੇ ਚੌਥੀ ਪੜਾਵੀ ਸਮਾਪਤੀ ਹੈ ਜੀ ਹਾਂ ਜੀ